ਹਾਂਜੀ ਕਿਵੇਂ ਹੋ ਸੁਣਿਓ ਕਦੇ ਕੋਈ ਸਾਡੇ ਲੈ ਸੇਵਾ ਹੋਈ ਤਾਂ ਜ਼ਰੂਰ ਦੱਸਿਓ ਸਾਨੂੰ ਬੰਦੇ ਦੇ ਕਾਫੀ ਲੈ ਕੇ ਆਈ ਰਿਏ ਚ ਹਮ ਦੇਣ ਵਾਲੇ ਨਹੀਂ ਲੈਣ ਵਾਲੇ ਚਾਹੀਦੇ ਆ ਉਹ ਮਾਲਕ ਜਾਨ ਲੈ ਵੀ ਲਵਾਂਗੇ ਜੀ ਹਾਂਜੀ ਚੱਲ ਫਿਰ ਦੇਖ ਲੈਨੇ ਆ ਉਹ ਸਾਹਮਣੇ ਕਾਲੀ ਰੇਂਜ ਇਸਤੀ ਆ ਹਾਂ ਉਹ ਪੀਬੀਐਕਸ 1 ਹਾਂ ਮਨਾ ਤਾਂ ਜੇ ਉਹਨਾਂ ਨੂੰ ਆ ਉਹ ਉਹ ਸਿੱਧੂ ਬਾਈ ਬਾਈ ਬਾਈ ਗਲਤੀ ਹੋ ਗਈ ਬਾਈ ਮੈਨੂੰ ਨਹੀਂ ਪਤਾ ਸੀਗਾ ਬਾਈ